ਸੇ ਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੋਲੀ ਪਾਇਨ ਵਿਸਰਿਆ ਗੁਣਤਾਸ ਪੂਰਬ ਲਿਖਿਆ ਕਮਾਵਣਾ ਮੈਂ ਜਿਹੜਾ ਮੈਂ ਲਿਖਿਆ ਸੀ ਤਾਂ ਇੱਥੇ ਅੱਗੇ ਕਰਦਾ ਮੇਰੇ ਅੰਦਰ ਫੁੱਲ ਉੱਠਦੇ ਸੀ ਨਾ ਬੰਨ੍ਹ ਕਰਕੇ ਮਾਇਆ ਨੂੰ ਦੇਖ ਕੇ ਮੈਂ ਬੰਦ ਕਰਤੇ ਪੂਰਬ ਵਿੱਚ ਜਿਹੜਾ ਲਿਖਿਆ ਸੀ ਜਨਮ ਤੇ ਜਨਮ ਇਹ ਆਖੀ ਸੀ ਨਾ ਜਿਸ ਤਾਲਨਾ ਕਰਕੇ ਜਨਮ ਲਿਆ ਸੀ ਪੂਰਬ ਲਿਖਿਆ ਸਤਗੁਰ ਕੋਣ ਸੀਗਾ ਉਹਦੇ ਹਿਸਾਬ ਨਾਲ ਕੋਈ ਚੱਲਦਾ ਪੂਰਬ ਲਿਖਿਆ ਕਮਾ ਹੁਣ ਪੂਰਬ ਲਿਖੇ ਦੀ ਜੋ ਕੰਮ ਆਏਗੀ ਤਨਲੀ ਤੋਂ ਆਇਓ ਲਾਹਾ ਲੈਣ ਪੂਰਬ ਲਿਖਿਆ ਸੀ ਇਹ ਹੁਣ ਲਾਹਾ ਲੈ ਰਹੇ ਆਂ ਆਇਓ ਕਰਨਾ ਤੁਹਾਨੂੰ ਕੋ ਬਾਣੀ ਕਰਤੇ ਆਪ ਲਿਖਿਆ ਕਰਤੇ ਨੇ ਆਪ ਲਿਖਿਆ ਸੀ ਉਹਦਾ ਲਿਖਿਆ ਹੋਇਆ ਕੀ ਕਰਤੇ ਦਾ ਕਰਤਾ ਕੌਣ ਸੀ ਇੱਥੇ ਫਿਰ ਕਰਤਾ ਅੰਦਲਾ ਠੀਕ ਹੈ ਸੀ ਕਰਕੇ ਹੀ ਸੀ ਠੀਕ ਹੈ ਮੰਨ ਹੁਣ ਜੋ ਕਰਤੇ ਨੇ ਲਿਖਿਆ ਸੀ ਉਹ ਕਾਰਕਮਾ ਰਿਹਾ ਹੈ ਹਾਂ ਉਹਦੇ ਨਾਲ ਕਰ ਰਹੇ ਹੁਣ ਬੁਰਕੇ ਬਜਨ ਦੇ ਧਾਰਾ ਧਾਰੀ ਹੋ ਗਿਆ ਨਾ ਹਾਂਜੀ ਮੋਹ ਠਗੌਲੀ ਪਾਈ ਹਨ ਵਿਸਤ੍ਰਿਆ ਗੁਣਤਾ ਜਿਹੜੇ ਬੋੜ ਹੋਲੀ ਦੇ ਵਿੱਚ ਨੇ ਮਾਇਆ ਦਾ ਬੋਹ ਜਿਹਨਾਂ ਨੂੰ ਉਹਨਾਂ ਦੇ ਫਸ ਗਏ ਨੇ ਮੀਂਹ ਦੇ ਗੋਠ ਫਸੇ ਨੇ ਮਾਇਆ ਦੇ ਗੋਠ ਫਸੇ ਨੇ ਉਹਨਾਂ ਨੂੰ ਵਿਸਰ ਗਿਆ ਦੇਖਿਆ ਉਹ ਸਤਗੁਰਾਲੀ ਕਾਲ ਦੀ ਕਮਾ ਉਹਨਾਂ ਸਤਗੁਰ ਨਾਲ ਸੰਪਰਕ ਨਹੀਂ ਉਹਨਾਂ ਦਾ ਹੈ ਇਹ ਗੁਣ ਉਹਨਾਂ ਦਾ ਵਿਸਰ ਗਿਆ ਔਰ ਨਹੀਂ ਕਰ ਰਹੇ ਕੋਈ ਗੜੀ ਕਰ ਮਤ ਜਾਣੋ ਜਗ ਜੀਵ ਦਾ ਦੂਜੇ ਪਾਏ ਮੋਯਾਸ ਜਿਹੜੇ ਜਨਤਾਲ ਦੇ ਆ ਵਾ ਦੂਜੀ ਭੁੱਖ ਚਾ ਆ ਹਦੂਦ ਹੂੰ ਤੁਹਾਂ ਜਿਉਂਦਾ ਨਾ ਤੁਸੀਂ ਸਤਿ ਜਾਣ ਜਗ ਜੀਵ ਦਾ ਦੇ ਰਿਹਾ ਜਿੰਨੀ ਗੁਰਮੁਖੀ ਨਾਮ ਨਾ ਚੇਤੇਓ ਤੇ ਬਹਿਣ ਨਾ ਮਿਲਣੀ ਪਾਸ ਦੁੱਖ ਲੱਗਾ ਬਹੁਤ ਘਣਾ ਪੁੱਤਰ ਕਲਤਰ ਨਾ ਸਾਥ ਕੋਈ ਜਾਤ ਜਿਹੜੇ ਗੁਰਮੁਖੀ ਨਾਮ ਨਾਲ ਕੀਤੇ ਦੇ ਨਾਲ ਗੁਰਮੁਖੀ ਨਾਮ ਆਇਆ ਹੋਇਆ ਹੈ। ਧੋਖ ਤਾਂ ਬਹੁਤ ਜਨਾਂ ਦੇ। ਗੁਰਮਖਾ ਦਾ ਨਾਮ ਵੱਖਰਾ ਹੈ। ਗੁਰਮਖਾ ਜਿਹੜੇ ਹੁਕਮ ਪ੍ਰਤੀ ਚੇਤਨ ਨਹੀਂ ਹੋਏ। ਜਿਨ੍ਹਾਂ ਨੇ ਹੁਕਮ ਪ੍ਰਤੀ ਹੁਕਮ ਨੂੰ ਗੁਜ਼ਿਆ ਨਹੀਂ ਹੈ। ਜੇ DNA ਦੇ ਪਾਸ ਉਹ ਆਪਣੇ ਨਾਲ ਉਹ ਸੱਚ ਦੇ ਨਾਲ ਬੈਠ ਨਹੀਂ ਸਕਦੇ। ਉਹ ਭਾਂਵੇਂ ਅੰਤਰਾਧਮਾਨ ਹੋਣੀ ਮੈਨੇ ਉਹ ਮਾਇਆ ਜਿਹੜੀ ਉਹਨਾਂ ਦੇ ਅੰਦਰ ਚੁਕਾ ਦਿਆ ਸਕਦਾ ਉਹਨਾਂ ਨੇ ਬੰਦੂ ਸ਼ਾਂਤੀ ਨਹੀਂ ਆ ਸਕਦੀ ਦੁੱਖ ਲਾਗਾ ਬਹੁਤ ਹਾਂਜੀ ਬਹੁਤ ਜ਼ਿਆਦਾ ਦੁਖੀ ਰਹੋ ਸੁੱਖ ਲੱਗਿਆ ਹੈ ਸਾਰਾ ਦੁਖੀ ਹੋਈ ਹੈ ਅਟਕੜ ਪੁੱਤ ਕਲਕਟਾ ਨਾਲ ਸਾਥ ਕੋਈ ਜਾਣ ਸਾਥ ਕਿਸੇ ਦੀ ਨਹੀਂ ਦੇਣਾ ਲੜਾਈ ਇਹਨਾਂ ਨਾਲ રોજ ਹੁੰਦੀ ਹੈ ਨਾਲੇ ਉਹਨਾਂ ਖਤਰ ਤੁਰਿਆ ਫਿਰਦਾ ਨਾਲੇ ਉਹਨਾਂ ਨਾਲ ਲੜਾਈ ਵੀ ਲੜਦੀ ਆ ਭੈਂ ਜੀ ਰੰਦਰ ਕਰੇਸ ਰੰਦਰ ਨਾਲੇ ਘਰ ਚ ਉਹਨਾਂ ਖਤਰੇ ਦੀ ਬਰਦਾਸ਼ਤ ਕਰਦਾ ਉਹ ਹੀ ਉਹਨਾਂ ਨਾਲ ਕਲੇਸ਼ ਆਇਆ ਹੈ ਕਦੇ ਇਹ ਪਾਲਣ ਨਾ ਨਾ ਕਦੇ ਠੀਕ ਹੈ ਜੀ ਹਾਂ ਲੋਕਾਂ ਵਿੱਚ ਮੂੰਹ ਕਾਲਾ ਮਨ ਮੁੱਖਾ ਨੂੰ ਕੋਨਾ ਵਿਸ ਵਿਸਹੀ ਚੂਕ ਗਿਆ ਵੇ ਸਾਥ ਲੋਕਾਂ ਦੇ ਮੁਕਾਲਾ ਹੋਇਆ ਦੁਨੀਆ ਦੇ ਦਾਗੂ ਕਾਲਾ ਹੋਇਆ ਅੱਧਰੋਂ ਪੇ ਸਾਥ ਅੱਧਰੋਂ ਪਸੌਦਾ ਜਨਮ ਮਰਦਾ ਉੱਪਰ ਨੂੰ ਕੋਈ ਮਨ ਤੇ ਕੋਈ ਵਿਸਾਇ ਨਹੀਂ ਕਰਦਾ ਕੋਈ ਰੋਸਾ ਨਹੀਂ ਕਰਦਾ ਹੁੰਦਾ ਇੱਕ ਦੂਜੇ ਦਾ ਕਰਦੇ ਕੌਣ ਕਰਦਾ ਇੱਕ ਅਸੀਂ ਕਿਦਾ ਤਾਂ ਨਹੀਂ ਕਰਦਾ ਕੋਈ ਜਾਂਦਾ ਜਿਹੜੀ ਕਰਦਾ ਉੱਤੋਂ ਤੋਂ ਭਾਵੇਂ ਜੋ ਮਰਜ਼ੀ ਕਰ ਜਾ ਹਾਂ ਚੁੱਪ ਗਿਆ ਕਰਦੇ ਲੋਕ ਹਾਂਜੀ ਕਰਦੇ ਨੇ ਅੰਦਰੋਂ ਵੀ ਕੁਝ ਕਰਦੇ ਨੇ ਵਿਰੋਧ ਨਹੀਂ ਕਰਦਾ ਫਿਰ ਵੀ ਗੁਰਬਾਨੀ ਕਰਦਾ ਉਹ ਗੱਲ ਅਲੱਗ ਆ ਪੂਰਾ ਭਰੋਸਾ ਕਰੇ ਨਾ ਕਰੇ ਐਂ ਨਹੀਂ ਕਹਿੰਦਾ ਵੀ ਇਹ ਗੱਲ ਗਲਤ ਇਹ ਗੁਰੂ ਮੰਖੀ ਦੀ ਗੱਲ ਹੈ ਗੁਰੂ ਖਰਦੇ ਦਾ ਬਰੋਸਾ ਸਾਰੀ ਕਰਦਾ ਤੇ ਸਾਰੇ ਕਹਿੰਦੇ ਚੰਗਿਆਰ ਵੀ ਸੀ ਉਹ ਵਧੀਆ ਸੀ ਅਸੀਂ ਹੁੰਦਾ ਜਿਹੜਾ ਬਿੱਥੇ ਪਿਆਰਾ ਹੁੰਦਾ ਕਟਾ ਕੇ ਆ ਇਹ ਜੀ ਗੱਲ ਤਾਂ ਹੈ ਜਰੂਰ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਹੜਾ ਅੰਤਰ ਨਾਮ ਨਿਵਾਸ ਤਕੋ ਜਨ ਸੰਸਾਰ ਦੇ ਵਿੱਚ ਗੁਰਮੁਖ ਚਾਹੇ ਦੁਖੀ ਵੀ ਰਹਿੰਦੇ ਨੇ ਦੁੱਖਾਂ ਦੀ ਦੀਵਾਂ ਚ ਸਾਰੀ ਦਿਸਤੀ ਤੋਂ ਦੁੱਖ ਲੱਗਦੇ ਰਹਿੰਦੇ ਗੁਰਮੁਖਾਂ ਨੂੰ ਪਰ ਅਗਲਾ ਸੁਖ ਜਿਹੜਾ ਹੈ ਉਹਨਾਂ ਨੂੰ ਅੱਗੇ ਸੁੱਖੇ ਤੋਂ ਕੋਈ ਦੁੱਖ ਨਹੀਂ ਹੁੰਦਾ ਅਗਲਾ ਕਹਿਤਾ ਅਗਲੇ ਸੁਖ ਤੇ ਉਹਨਾਂ ਦੀ ਨਿਗਾਹ ਹੁੰਦੀ ਆ ਸंसारी ਸੁਖ ਤੇ ਨਿਗਾਹ ਨਹੀਂ ਹੁੰਦੀ ਸਾਰੇ ਸੁਖ ਉਹ ਹੀ ਨਹੀਂ ਹੁੰਦੇ ਸਾਰੇ ਸੁਖ ਨੂੰ ਪਛਾਣ ਕਰਕੇ ਜਾਣਦੇ ਹੁੰਦੇ ਨੇ ਅਗਲਾ ਸੁਖ ਹੈ ਜਿਹੜਾ ਜੀਵਤ ਬਹੁਤ ਜਿਹੜਾ ਬਹੁਤ ਦੇ ਸੰਸਾਰੀ ਜੀਵਨ ਕਿੱਦਾਂ ਚੱਲਦਾ ਦਨ ਲਿਮਿਟਡ ਜੀਵਨ ਹੈ ਅਗਲਾ ਜਿਹੜਾ ਹੈਗਾ ਸਾਜੀਵਨ ਬੜਾ ਜਿਹੜਾ ਜੀਵਨ ਉਹਦੇ ਸੁਖ ਦੀ ਗੱਲ ਕਰੀਏ ਛੋਟੇ ਜਿਹੇ ਦੀ ਗੱਲ ਕਰੀਏ ਸੰਸਾਰ ਦੇ ਸੁੱਖਾਂ ਨੂੰ ਅਲਪ ਸੁਖ ਕਹਿੰਦੇ ਹਾਂ ਅਲਪ ਥੋੜੀ ਦੇਰ ਲਈ ਟਾਈਮ ਲਈ ਸੁਖ ਸੁਖਦੇ ਹਾਂ ਟਾਈਮ ਲਈ ਸੁਖ ਬਰਾਬਰ ਸਮਝਦੇ ਰਹੋ ਇਸ ਕਰਕੇ ਅਗਲਾ ਸੁਖ ਦੀ ਗੱਲ ਹੈ ਉਹ ਅਗਲਾ ਸੁਖ ਹੁੰਦਾ ਹੈ ਉਹ ਠੀਕ ਹੈ ਜੀ ਜਿਨ੍ਹਾਂ ਅੰਤਰਨਾਮ ਨਿਵਾਸ ਅਨਾ ਨਾਮ ਲਾ ਲਿਆ ਠੀਕ ਹੈ ਜਿਨ੍ਹਾਂ ਨੇ ਗਿਆਨ ਪ੍ਰਾਪਤ ਕਰ ਲਿਆ ਗੁਰਮਤਿ ਦਾ ਗਿਆਨ ਹੀ ਨਿਵਾਸ ਕਰਨੇ ਆ ਜਿਨ੍ਹਾਂ ਗੁਰਬਾਣੀ ਟਿਕ ਗਈ ਉਹਦਾ ਸਮਝ ਨਹੀਂ ਜੀ ਲੋਦੇ ਉਹਨਾ ਬੋਲਦੇ ਕਿ ਜੇ ਲੋਕ ਤੇ ਕਦੋਂ ਬਿਠੇ ਕਿਹਾ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ ਸਤਿਗੁਰ ਕਾ ਪਾਣਾ ਆਨੰਦ ਕਰੈ ਤੇ ਸਚ ਰਹਿ ਸਮਾਏ ਜਿਸ ਹੈ ਸਚਾ ਸਚੁ ਹੁਟੇ ਜਿਹੜੇ ਕਿਰਤੀ ਨੂੰ ਹੱਥ ਲਾਉਣ ਵੰਡਣ ਸੈਣ ਜਿਹਨੇ ਨਾਮ ਆਉਣੇ ਬਿਵਾਦਨ ਲੋਗ ਦੇ ਵਿੱਚ ਜਿਹੜੇ ਲੈਣ ਨਾ ਲੋਗ ਦੇਣ ਅਨੋਗ ਤਨ ਵੰਡਣ ਜੋ ਕਾਮ ਉਤੇ ਪ੍ਰਾਪਤ ਹੋਵੇ ਉਸੈਣ ਉਹੀ ਸੱਜਣ ਸਭ ਦੇ ਤੁੱਕੇ ਸਾਹਮਣੇ ਰਹੇ ਰਹੇ ਸਭ ਦਾ ਪਤਾ ਕਿ ਉਹਨੇ ਨਹੀਂ ਇਹੜੇ ਸੰਗਤ ਪਲਾ ਚਾਹੀਓ ਸਜਣ ਆਪ ਸਹੜੀ ਨੇ ਆਪ ਫੱਟਦੀ ਕਰਦੇ ਕਰ ਤੱਕ ਸਾਕੀ ਆਪ ਖੜਦੇ ਨੇ ਤੇ ਦੂਜਿਆਂ ਨੂੰ ਬੰਨਦੇ ਨੇ ਸੱਚਾ ਉਹ ਸਹੜੀ ਸਜਣ ਜੀ ਜੇ ਗੁਰ ਗੁਰਮੁਖੀ ਲੈਸ ਹਾਂਜੀ ਗੁਰਮੁਖੀ ਸਵੇਰੇ ਸਵੇਰੇ ਇਕੱਠ ਜੱਦੇ ਨੇ ਉਹ ਆ ਕਰਕੇ ਉਹਨਾਂ ਦਾ ਮੇਲ ਹੁੰਦਾ ਗੁਰਪਖਾਂ ਦਾ ਗੁਰਪਖੀ ਐਕਟੂ ਇਹਨਾਂ ਉਹਨਾਂ ਦਾ ਮੱਤ ਭੇਦ ਨਹੀਂ ਹੁੰਦਾ ਗੁਰੂ ਦਾ। ਸੱਜ ਸਾਰੇ ਭਗਤ ਨੇ ਉਹ ਸੋਖ ਕਿਉਂ ਤੇ ਮੱਤ ਭੇਦ ਹੈ। ਇੱਥੇ ਸਿਰਫ ਰਾਜ ਕਿਉਂ ਮੱਤ ਭੇਦ ਹੈ ਸਾਰੇ ਕਰਕੇ ਸਾਰੇ ਬਿਲੇ ਹੁੰਦੇ ਨੇ ਕੁੱਝ। ਫਿਰ ਟਕਰਾਉ ਹੈ। ਠੀਕ ਹੈ ਜੀ। ਸਤਗੁਰ ਕਾ ਪਾਣਾ ਹੰਦਨ ਕਰੈ ਸੇ ਸਾਰੇ। ਗੁਰਸਿੱਖ ਸਾਰੇ ਤੇ ਪਾੜੀ ਚੱਲਦੀ ਸੀ ਉਹੀ ਖਬਰਾਂ ਦੇ ਸੀ ਸਾਚਰਾਂ ਦੇ ਨਿਵਲੇ ਸਾਚਰਾਂ ਨਾਲ ਜੁੜੇ ਰਹੇ ਸੀ ਉਥੇ ਟਕਣਾ ਸੀ ਮੈਂ ਕਿਹਾ ਉਹਨਾਂ ਸਮਾਏ ਸਮਾਏ ਰਹੇ ਨਿਵਲੇ ਰਹੇ ਉਹ ਵੀ ਸਮਾਏ ਹੋਇਆ ਸੀ ਉੱਦ ਸਮਾਏ ਲੇ ਕੇ ਸਾਚੀ ਦੇ ਸਮਾਏ ਰਹਿੰਦੇ ਦੂਜੇ ਪਾਏ ਲੱਗਣ ਸੱਜਣ ਨਾ ਆਖੀਐ ਆ ਇਹਨਾਂ ਨੇ ਡੈਫੀਨੇਸ਼ਨ ਹੀ ਬਦਲਤੀ ਹੈ ਅਸੀਂ ਵੀ ਸੱਜਣ ਕਹਿੰਦੇ ਹਾਂ ਸੰਸਾਰ ਦੀ ਕਹਿੰਦੇ ਜਿਹੜੇ ਮਾਇਆ ਕਰਦੇ ਤੇ ਸੱਚ ਦੇ ਨਾਲ ਜਿਹੜੇ ਜੁੜੇ ਹੋਏ ਦੀ ਹਣ 24 ਘੰਟੇ ਰਹਿੰਦੇ ਉਹਨਾਂ ਨੂੰ ਸੱਜਣ ਹੀ ਆਖਿਆ ਜਾਣਾ ਚਾਹੀਦਾ ਦੂਜੇ ਪਾਏ ਲੱਗੇ ਜਿਹੜੇ ਮਾਇਆ ਦੇ ਪਿੱਛੇ ਲੱਗੇ ਹੋਏ ਚਾਹੇ ਉਹ ਜਗਤ ਕਰਦੇ ਵੀ ਚਾਹੇ ਉਹ ਨੰਦਰ ਚਲਾਉਦੇ ਤੇ ਕੁਝ ਵੀ ਕਰ ਸਕਦੇ ਮਾਇਆ ਤੇ ਬਿਲਕੁਲ ਨੰਦਰ ਸ਼ਬਦ ਦਾ ਵੀ ਚਲਾਉਂਦੇ ਰੋਟੀਆਂ ਦੇ ਚਲਾਉਂਦੇ ਰੋਟੀਆਂ ਦੇ ਨੰਦਰ ਨਾਲੇ ਸਰੀਰ ਵਾਸਤੇ ਹੋ ਨਹੀਂ ਸਕਣ ਲੋਕ ਤੇ ਦੂਜੇ ਪਾਏ ਪਾਣਾ ਜੱਗ ਦੇ ਕਬਜ਼ੇ ਸੱਤੋ ਗੋੜੀ ਪਰ ਉਹ ਗੁਰਮਖੀ ਨਹੀਂ ਹੈਗੀ ਨਾ ਅੱਖੀਆਂ ਨੂੰ ਸੱਜਣੇ ਅੱਖਾਂ ਜਾਲਾ ਚਾਹੀਦਾ ਉਹਨੂੰ ਸੱਜਣ ਰੱਖਣਾ ਲਾਜ਼ਮ ਹੈ ਗੁਰੂ ਨਾਨਕ ਸਾਹਿਬ ਆਉਗਾ ਸਾਰਿਆਂ ਦੇ ਸੱਜਣ ਲੋਕ ਜੇ ਅਬ ਅਮਾਨ ਕਰਨ ਵਿਕਾਰ ਹੋਰ ਹੰਕਾਰ ਹੀ ਦੇ ਜਿਹੜੇ ਲੰਦਰ ਚਾਹੁੰਦੇ ਨੇ ਕੁਝ ਵੀ ਕਰਦੇ ਨੇ ਕਾਰ ਸੇਵਾ ਵੀ ਕਰਦੇ ਨੇ ਸਭ ਉਹਦੇ ਪਰ ਜੇਕਰ ਮਾਇਆ ਉਥੋਂ ਤੱਕ ਹੀ ਆਗਦੀ ਮਾਇਆ ਦੇ ਨਾਲ ਕੰਮ ਕਰਦਾ ਜਦੋਂ ਤੱਕ ਉਹਦੇ ਅੰਦਰ ਸਭਾਰ ਹੈ ਦੁਨੀਆ ਦੀ ਵਿਡਿਆਈ ਦੀ ਇੱਛਾ ਰੱਖਣਾ ਵੀ ਹੰਕਾਰ ਇਹਦੇ ਪਿੱਛੇ ਵੀ ਹੰਕਾਰ ਕੰਮ ਕਰਦਾ ਇਹ ਦੁਨੀਆ ਦੀ ਵਿਡਿਆਈ ਦੀ ਇੱਛਾ ਤਾਂ ਹੈ ਉਹ ਹੈ ਨਾ ਉਹਨਾਂ ਲੋਕਾਂ ਚਾਲੂ ਦੁਨੀਆ ਦੀ ਬਚਾਈ ਦੀ ਇੱਛਾ ਨਹੀਂ ਰਹੀ ਫਿਰ ਇਹ ਜਗ੍ਹਾ ਵੀ ਕਰ ਦੋ ਫਿਰ ਉਹ ਸੱਤਰੇ ਕਾ ਫਿਰ ਉਹ ਕੀ ਕਰਦਾ ਫਿਰ ਗੁਰ ਕੀ ਬਤ ਲੈਦਾ ਔਰ ਗੁਰ ਕੀ ਬਤ ਦਿੰਦਾ ਗੁਰ ਕੀ ਬਤ ਡੁੱਬੇ ਛਾਣੇ ਦੂਜੇ ਛਾਣੇ ਨੇ ਕਿਤੇ ਕੰਮ ਕਰਨ ਵਾਲੇ ਛਾਣੇ ਜਰੂਰ ਨੇ ਵੀ ਜੰਗਾ ਕੰਮ ਕਰਦੇ ਨੇ ਪਰ ਡੁੱਬ ਜਾਂਦੇ ਨੇ ਅਸਲ ਕੀ ਫਕਤੀ ਤੇ ਬਿਨ ਗੁਰ ਕੀ ਲੈਣ ਤੋਂ ਬਿਨ ਡੁੱਬ ਜਾਂਦੇ ਨੇ ਇਹ ਗੁਰ ਕੀ ਬਤ ਮੰਨ ਲਈ ਹੋਵੇ ਤਾਂ ਦੱਸ ਦੇ ਕੀ ਬਤ ਕੀ ਆ ਦੀ ਵੀ ਗੱਲ ਕਰਦੇ ਮੁਰਗਨਾ ਤੇ ਇਹ ਨਹੀਂ ਕੋਈ ਗੱਲ ਕਰਦੇ ਠੀਕ ਠੀਕ ਇਹ ਗੱਲ ਉੱਪਰ ਚਲੀ ਆਪ ਤਾਂ ਉੱਪਰਲੀ ਦੀ ਆਪਣੀ ਹੱਦ ਖੁੱਦੀ ਹੋਵੇ ਉਹਨਾਂ ਦੇ ਕਾਲ ਜਿਹੜੇ ਕਾਜ਼ ਨਾ ਸਕੇ ਸਵਾਰ ਉਹ ਜੋ ਜਿਹੜੇ ਹੁੰਦੇ ਨੇ ਆਪਣਾ ਸਵਾਰਥ ਦੇ ਵਿੱਚ ਉਹ ਕਿਸ ਦਾ ਸਵਾਰਥ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਜਾਨਕਨ ਪੂਰਬ ਲਿਖਿਆ ਜਿੰਨੇ ਕਮਾਵਣਾ ਉਹ ਨੂੰ ਕੋਈ ਬਦਲ ਸਕਦਾ ਕੋਈ ਪੂਰਬ ਲਿਖਿਆ ਫੇਰ ਆਇਆ ਉਹ ਆਪਣਾ ਹੁਣ ਮੰਨ ਦੇ ਵਜ੍ਹਾ ਅਸੀਂ ਲੰਗਰ ਚਲਾਉਣਾ ਉਹ ਆਪਣੀ ਗੁਰਬਖੀ ਤੋਂ ਚਲਾ ਰਹੇ ਸੀ ਕਾਰਜੇ ਵਾ ਵੀ ਆਪਣੀ ਗੁਰਬਖੀ ਤੋਂ ਕਰ ਰਹੇ ਸੀ ਜੋ ਕਰ ਰਹੇ ਨੇ ਲੋਕ ਹੋਰ ਦਾ ਉਹ ਆਪਣੇ ਬੰਦੀ ਚੱਲ ਕਰ ਕਹਿੰਦਾ ਜਿੱਦ ਤੁਰੂ ਨਾ ਲੈ ਗਿਆ ਬੁੱਧੀ ਲੈ ਗਈ ਪੂਰਬ ਲਿਖਿਆ ਨਹੀਂ ਕਰ ਰਹੇ ਪੂਰਬ ਲਿਖਿਆ ਕੁਝ ਹੋਰ ਹੁੰਦਾ ਉਹ ਤਰ੍ਹਾਂ ਆਦਮਾਂ ਨਾਲ ਤਾਂ ਨਾ ਸਬਰ ਕੇ ਸੀ। ਜੋ ਜੀ ਕੋਈ ਨਾ ਬੈਠਣਸਾਰ। ਉਹਨਾਂ ਕੋਈ ਬਿਠਾ ਸਕਦਾ। ਇਹ ਕਬ ਇਹ ਜਿਹੜਾ ਉਹ ਸੋਲਣ ਉਹ ਕਬ ਛੱਡਣਗੇ। ਹਾਂ। ਜਿਹੜਾ ਅਸੀਂ ਕਹਿੰਦੇ ਕਬ ਕਰ ਰਹੇ ਹਾਂ ਇਹਨੂੰ ਨਹੀਂ ਕੋਈ ਛੱਡਾ ਸਕਦਾ। ਇਹ ਤੋਂ ਕਹਾ ਕੋਈ ਕੰਮ ਨਹੀਂ ਦੀਨੋ ਸਕਦਾ। ਠੀਕ ਹੈ। ਪੁਰਬ ਦੇ ਖੇਤ ਤੋਂ। ਉਹ ਜਿਹੜਾ ਅਸੀਂ ਪੁਰਬ ਲੈ ਕੇ ਹਾਂ ਉਹ ਕਬ ਤੋਂ ਅੱਛਾ ਕਬ ਕੋਈ ਨਹੀਂ ਹੈ ਉਸਤਾਰ। ਹਾਂ ਜੀ। ਹੋਰ ਆਪੇ ਜਗਤ ਉਪਾਇਕ ਹੈ ਆਪ ਖੇਲ ਰਚਾਇਆ। ਸ੍ਰੈਗੁਣ ਆਪ ਸਿਰਜਿਆ। ਮਾਇਆ ਮੋਹ ਵਿਧਾਇਆ। ਖੇਲ ਕੇ ਆਪੇ ਸੰਸਾਰ ਪਹਿਲਾ ਕੀਤਾ ਆਪੇ ਇਹ ਖੇਲ ਰਚਿਆ ਹੋਇਆ। ਵੀ ਖੇਲੇ ਆ। ਖੇਲ ਦੇ ਵਿੱਚ ਆ ਜਾਂਦਾ। ਕਿਹਰੇ ਹੱਥ ਚਾ ਖੇਲ ਲਿਆ। ਰੈਗੁਣ ਆਪ ਸਰਜਿਆ ਆਇਆ ਹੋ ਬਧਾਇਆ ਤੇਰੇ ਕੋਲ ਆਪੇ ਸਰਜੇ ਤਰਜੋਤੋਂ ਸਤੋ ਤੇ ਨਸੇ ਜਾਣ ਸਭ ਲੋਕ ਤੇ ਰਜੋਗਣ ਤੇ ਸਤੋ ਗਣ ਕਿ ਸੁਖਾ ਦੂਸਰੇ ਜਾਣੇ ਜਿਹੜੇ ਦੂਏ ਖਬਰੇ ਨਾ ਚੱਗੇ ਜੋ ਵੀ ਹੈ ਅੱਪੜਾਈ ਹੋਰ ਕਰਾਉਣੀ ਕੋਈ ਕੁਛ ਕਰਦਾ ਗਰੀਬਾਂ ਨੂੰ ਕਰਦਾ ਦਾਨ ਕਰਦਾ ਇਹ ਸਤੋ ਉੜ ਕੇ ਆ ਜਾਂਦਾ ਇਹ ਮਾਇਆ ਹੋ ਬਧਾਇਆ ਇਹਦੇ ਚ ਮਾਇਆ ਆਤਮਾ ਦੇ ਵਾਸਤੇ ਭਲੇ ਵਾਸਤੇ ਦੀਵਲਾ ਨੇ ਉਹਦੇ શરીર ਦੇ ਭਲੇ ਵਾਸਤੇ ਤੈ ਆਪੇhetra ਵਿੱਚ ਤਾਂ ਆਪੇ ਸਭ ਕੁਝ ਪਹਿਲਾ ਕੀਤਾ ਇਸ ਸੰਸਾਰ ਇਹ ਤੇਰਾ ਖੇਲ ਤੈ ਆਪਰ ਆਇਆ ਸਤਗੁਰ ਪਹਿਲਾ ਕੀਤਾ ਰਿਹਾ ਆਇਆ ਦੇ ਜੋ ਤੂੰ ਸਤੋ ਇਹ ਮਾਇਆ ਵੋ ਹੈ ਸਤਗੁਰ ਮਾਇਆ ਵੋ ਦੇ ਚੀਜੇ ਮਾਇਆ ਮੋ ਵੇ ਆਇਆ ਜਿੰਨਾ ਕੋਣਾ ਚ ਮਾਇਆ ਵੋ ਹੈ ਸਤਗੁਰ ਤੇ ਕਹਾ ਹੋਰ ਤਰਬ ਦੀ ਗੱਲ ਕਰਦੇ ਤੂੰ ਤਰਬ ਦੀ ਨਹੀਂ ਕਰਦਾ ਨਾ ਸਤਗੁਰ ਤੇ ਆਖਰੀ ਸਤਗੁਰ ਗੁਰਬਾਨੀ ਤੰਤਰ ਗੁਰੂਆਂ ਨੂੰ ਆਇਆ ਜੁਬਦੀ ਹੈ ਲੈ ਗੋਣ ਬਿੱਟੇ ਖਾਈਏ ਸਾਰ ਜੇ ਗੁਰਬਾਨੀ ਦਾ ਸਾਰ ਦਾ ਸਿਧ ਹੈ ਤਾਂ ਕਿੰਨਾ ਹੋਣਾ ਤੋਂ ਉਪਰ ਉੱਠ ਕੇ ਮਾਇਆ ਮੋਦੀ ਸਦਗੁਣ ਸਾਰੇ ਖਾਈ ਦੇ ਵਿੱਚ ਹੀ ਲੇਖਾ ਮੰਗੀ ਹੈ ਫਿਰ ਆਵੇ ਜਾਇਆ ਜਿਨਾ ਜਿਹੜਾ ਹੰਕਾਰ ਹੈ ਸਾਡੇ ਵਿੱਚ ਜਿਨ੍ਹਾਂ ਜਦ ਨਾਮੇ ਹੋਵੇ ਹੈਗੀ ਹੈ ਜਿਨ੍ਹਾਂ ਜਰ ਹੋਵੇ ਹੈਗੀ ਹੈ ਉਹਨਾਂ ਚ ਲੇਖਾ ਵੀ ਹੈਗਾ ਫਿਰ ਆਵਾਜ ਆਇਆ ਹੋਰ ਜਬਲ ਮੰਨੂ ਕਿਹਾ ਜਬਲ ਵਿੱਚ ਜਾਊਗਾ ਪੁਛਿਆ ਜਾਊਗਾ ਤੇ ਹਾਂ ਜਬਲ ਮੰਨੂ ਬਣ ਜਾਊਗਾ ਠੀਕ ਜਿਨ੍ਹਾਂ ਹਰ ਆਪ ਕਿਰਪਾ ਕਰੇ ਤੇ ਗੁਰ ਸਮਝਾਇਆ ਜਿਨਾ ਦੇ ਹੱਲ ਨੇ ਆਪ ਕਿਰਪਾ ਕਰੀਏ ਉਹ ਸਤਿ ਸੁਝਾਤਾ ਉਹ ਫਿਰ ਉਹ ਕਬੂਦੀ ਕਰਦੇ ਚਲੇ ਜੋ ਤਦੂ ਸਤੋ ਤਨਾ ਤੋਂ ਉਪਰ ਉੜ ਜਾਂਦੇ ਨੇ ਵਾਇਆ ਲਿਖਦੇ ਹੋ ਲੇਖਾ ਛਾੜ ਅਲੇਖਾ ਛੁੱਟਾ ਅਲੇਖੇ ਹੋ ਜਾਂਦੇ ਨੇ ਉਹ ਹੁਕਮ ਚ ਆ ਗਿਆ ਅਲੇਖੇ ਹੋ ਗਿਆ ਆਪਣੇ ਪਾਸ ਚੱਲਦਾ ਲੇਖਾ ਹੁਕਮ ਚੱਲਦਾ ਅਲੇਖਾ ਲੇਖਾ ਦੀ ਉਪਰ ਨਿਪਾਉ ਤੇ ਉਪਰ ਉੱਠ ਜਾਂਦਾ ਠੀਕ ਹੈ ਬਲਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਬਲਹਾਰੀ ਗੁਰ ਆਪਣੇ ਆਪਣੇ ਗੁਰ ਸਤਗੁਰ ਤੋਂ ਬਲਹਾਰੀ ਜਨ ਸਦਾ ਸਦਾ ਉੱਤੇ ਕੁਬ ਕੁਬ ਜਾ ਬਾਰ ਬਾਰ ਜਾ ਜਾਂਦਾ ਇੱਥੇ ਤੀਸਰੀ ਪੌੜੀ ਸੁਣੋਤੀ ਜੀ